ਜਿਵੇਂ ਕਾਇਦਾ ਲਿਖਿਆ ਨੰਨੇ ਤੋਂ ਬਾਦ ਅਗਲੀ ਲਾਈਨ ਸ਼ੁਰੂ ਹੁੰਦੀ ਹੈ ਪਪਾ ਭਗਤ ਕਬੀਰ ਜੀ ਨੇ ਦਿੱਤਾ ਜੀ ਪਪਾ ਅੱਖਰ ਦਾ ਉਪਦੇਸ਼ 27 ਨੰਬਰ ਪੌੜੀ 'ਚ ਜੀ ਪਪਾ ਅਪਰ ਪਾਰ ਨਹੀਂ ਪਾਵਾ ਪਰਮ ਜੋਤ ਸਿਉ ਪਰਚੋ ਲਾਵਾ ਜਿਹੜਾ ਸਤਖੰਡ ਅਪਰ ਹੈ ਉਹਦੇ ਉਹ ਕਿਨਾਰਾ ਹੈ ਹੀ ਸੋ ਪਰ ਪਾਰ ਨਹੀਂ ਪਾਬਾਸੀ ਦਾ ਪਾਰ ਨਹੀਂ ਪਾਉਣਾ ਹੈ دریا ਨੇ ਸਮੁੰਦਰ ਦਾ ਪਾਰ ਨਹੀਂ ਪਾਉਣਾ دریا ਨੇ ਸਮੁੰਦਰ ਨਾਲ ਉਹਦੇ ਨਾਸਟਟਾਏ ਕੇ ਹੋਣਾ ਜਾਂਦੇ ਉਹਦੇ ਨਾਲ ਮਿਲ ਲਈ ਹੈ ਜਿੱਥੇ ਸਮੁੰਦਰ ਦੇ ਚਰਨ ਲੈਣਾ ਚਰਨ ਤਨਾਰਾ ਚਰਨ ਹੁੰਦੇ ਨੇ ਸਮੁੰਦਰ ਦੇ ਚਰਣੀਓ ਲੱਗਣਾ ਜਾ ਕੇ ਸਮੁੰਦਰ ਦੇ ਪਾਰ ਨਹੀਂ ਪਾਉਣਾ ਸਮੁੰਦਰ ਦੇ ਵਿੱਚ دریا ਦੀ ਬੈਕ ਹੁੰਦਾ ਜਾ ਕੇ ਪਾਸੇ ਚਲੇ ਜਾਉਂਗਾ ਪਾਰ ਨਹੀਂ ਪਾਵਾ પરમજોત નો પરચા علاوہ પરમજોત ਨਾਲ પરચણા જાકે ચરણો નું લગણા ઓતેને जुड़े રહેણ ઓજી પાંચો ઇન્દ્રિય નિગ્રહ કરઈ પાપ પુણ દોહુ નિર્વરઈ પાંચો ઇન્દ્રિય આખા દેખણવાળીયાને કાન સુણનાવાલેને જીવ રસ લેન્ડિયા ખટા મઠા દસતી હે ચામડી ગર્ભસર્ત દસતી હે એ જેડીયા પાંચો ઇન્દ્રિયાને ਇਹ ਜਿਹੜਾ ਕਰੀ ਤਿਰਕੁਟੀ ਛੱਡ ਦੇਣੀ ਆ ਤੇਰ ਕੁੱਡੀ ਜੇ ਛੱਡਤੀ ਪੰਜੇ ਇੰਦਰੀਆਂ ਨਿਗਰ ਹੋ ਗਈਓ ਤੇਰ ਕੁੱਡੀ ਚ ਕਨੈਕਸ਼ਨ ਰਹਿਦਾ ਪੰਜਿਆਂ ਨਾਲ ਜੇ ਤੇਰ ਕੁੱਡੀ ਛੱਡ ਦਿੱਤੀ ਪੰਜੇ ਇੰਦਰੀਆਂ ਦਾ ਘਰ ਚ ਜਾਂਦਾ ਹੀ ਨਹੀਂ ਪੰਜੇ ਇੰਦਰੀਆਂ ਦਾ ਕਰ ਦਿਮਾਗ ਹੈ ਜਿਹਨੂੰ ਇਹ ਤਿਰਕੁਟੀ ਕਹਿੰਦੇ ਨੇ ਜੇ ਤਿਰਕੁਟੀ ਛੱਡਤੀ ਪੰਜੇ ਇੰਦਰੀਆਂ ਨਾਲ ਬਨੈਕਸ਼ਨ ਡੀ ਕਨੈਕਟ ਹੋ ਗਿਆ ਨਿਗਰ ਕਰਹੀ ਪਾਪ ਪੁੰਨ ਦਉਂ ਏਹ ਵਾਰੀ ਦਿਮਾਗ ਜਿਹੜਾ ਪਾਪ ਪੁੰਨ ਪੈਦਾ ਹੁੰਦਾ ਦਿਲ ਚੋਂ ਪਾਪ ਉਹਦੀ ਪੈਦਾ ਹੁੰਦਾ ਦਿਮਾਗ ਚੋਂ ਪਾਪ ਉਹ ਪੈਦਾ ਹੁੰਦਾ ਬਾਹਣੇ ਚ ਚੱਲ ਕੇ ਤਾਂ ਪਾਪ ਉਹ ਨਹੀਂ ਹੈ ਆਪਣੇ ਬਾਹਣੇ ਚੱਲ ਕੇ ਤਾਂ ਪਾਪ ਉਹਦਾ ਖਿਆਲ ਪੈਦਾ ਹੁੰਦਾ ਪਾਪ ਉਹਦਾ ਖਿਆਲ ਆਦਮੀ ਦਾ ਪੈਦਾ ਕੀਤਾ ਹੋਇਆ ਆਦਮੀ ਦੀ ਆਪਣੀ ਨੇ ਜਿਹਹੋਂ ਨਾਲੇ ਜੰਮਣ ਬਲਣਾ ਤੇ ਪੁੰਨੀ ਵੀ ਉਹੀ ਹੈ ਪਾਪੀ ਵੀ ਉਹੀ ਹੈ ਅਸੀਂ ਤਾਂ ਕੁਝ ਨਹੀਂ ਅਸੀਂ ਜਿਉਣਾ ਅਸੀਂ ਉਹਦੇ ਚਲਾਏ ਚੱਲਦੇ ਆ ਸਾਡੇ ਹੱਥ ਚ ਕੁਝ ਨਹੀਂ ਜਨਤਾ ਦੇ ਵਾਸਤੇ ਕੁਝ ਨਹੀਂ ਕਾਪੂ ਦਾ ਧਿਆਨ ਜਿਹੜਾ ਹਗਾ ਬਾਹਾਂ ਵੀ ਮੰਨਣ ਦਿੰਦਾ ਗਿਆਨ ਤਾਂ ਪੈਦਾ ਕਰਦਾ ਹੈ ਪੂਰੇ ਧਰਮ ਖੜੇ ਕਰ ਦਿੰਦਾ ਇਸ ਕਰਕੇ ਪੰਜਾਂ ਇੰਦਰੀਆਂ ਦੇ ਨਾਲ ਜੇ ਨਹੀਂ ਜੁੜਿਆ ਹੋਇਆ ਉਹ ਬਾਹਰ ਦੇਖਦਾ ਹੀ ਨਹੀਂ ਹੈ ਸਰੀਰ ਨਹੀਂ ਦੇਖਦਾ ਸਰੀਰ ਛੱਡਦਾ ਹੈ ਸਰੀਰ ਧਾੜ ਕਰਦਾ ਸਰੀਰ ਨਾਲੋਂ ਆਤਮਾ ਦਾ ਅੱਡ ਹੋਣਾ ਨੂੰ ਕਾਪੂ ਕਹਿੰਦਾ ਸਮਝਦਾ ਹੈ ਹੀ ਨਹੀਂ ਹੈ ਹੋ ਅਸਲ ਗੁਰਬਾਣੀਆਂ ਨੂੰ ਮੰਨਦਾ ਹੀ ਨਹੀਂ ਗੁਰਬਾਣੀ ਜਿਹੜਾ ਹਿਰਦੇ ਵਿਚ ਮੱਛਾ ਉਹਨੂੰ ਪਤਾ ਹੈ ਮਰਨਾ ਜੋਤ ਦਾ ਕੀ ਮਰਨਾ ਹੈ ਤੇ ਮਰਨਾ ਸਾਡਾ ਸਬੰਧ ਜੋਤ ਨਾਲ ਹੈ ਸਾਡਾ ਸਬੰਧ ਸਰੀਰ ਨਾਲ ਹੈ ਜੀ ਦੇ ਲੈਵਲ ਤੇ ਜੋਤ ਦੇ ਲੈਵਲ ਤੇ ਮਰਨਾ ਮੰਨਣਾ ਮਾਰਨੇ ਸੀ ਮਰ ਉਹ ਮਾਰੇ ਨਹੀਂ ਮਾਰਨੇ ਸੀ ਪਕਾਰ ਪਕਾਰ ਉਹ ਮਾਰੇ ਨਹੀਂ ਹਾਂਜੀ ਤੇ ਅਖਰ ਸਾਹਿਬ ਦਾ ਉਪਦੇਸ਼ ਹੈ ਜੀ 24ਵੀਂ पप्पे पातशाह परमेश्वर वेखन को प्रपंच किया देखै बुझै सब किस जाणै अंतर बाहर रब रहया आप पप्पे पारब्रह्म परमेश्वर ने प्रपंच कीता जड़ा संसार के परपल चाय है ओ ड्रामा ही है कुछ नहीं है गा जब को ड्रामा देखण नु हुंदा है चितर ਕੁੱਝ ਤੇਰੇ ਨਾਲ ਜੁੜਨਾ ਜਿਹੜਾ ਜਿਹੜਾ ਇਹਦੇ ਵਿੱਚ ਬਿਹਾਰੀ ਕੁਦਰਤ ਬਸਿਆ ਕੁਦਰਤ ਜਿਹੜਾ ਵਿੱਚ ਬਸਿਆ ਹੁਕਮ ਉਹਨੂੰ ਦੇਖੋ ਤੁਸੀਂ ਜੋ ਹੋ ਰਿਹਾ ਉਹਨੂੰ ਛੱਡੋ ਪਰੇ ਕਰ ਰਿਹਾ ਕੌਣ ਹੈ ਉਹ ਦੇਖੋ ਹੋ ਰਿਹਾ ਦੀ ਹੈ ਛੱਡੋ ਪਰੇ ਜੋ ਹੋ ਰਿਹਾ ਇਹਦੇ ਵਿੱਚ ਪੁੰਨ ਪਾਪ ਦੀਦਾ ਸਾਨੂੰ ਜੋ ਕਰ ਰਿਹਾ ਉਹਦੇ ਵਿੱਚ ਪੁੰਨ ਪਾਪ ਨਹੀਂ ਹੈ ਕੁੱਝ ਕੋਈ ਦੋਖ ਹਾਂਜੀ ਵੇਖਣ ਕੋ ਪ੍ਰਪੰਚ ਕੀਆ ਉਹਨੇ ਆਪਣੇ ਦੇਖਣ ਨੂੰ ਕੀਤਾ ਪ੍ਰਪੰਚ ਬਸ ਦੇਖਣ ਆਇਆ ਤਾਂ ਸਹੀ ਹੈ ਜਦ ਤਮਾਸ਼ਾ ਹੈ ਤਸਬ ਬਾਜਾ ਗਾ ਮੈਂ ਹੂੰ ਕਰਮਪੁਰ ਫਕਾ ਦਾਸਾ ਦੇਖਣ ਆਇਆ ਜਦ ਸਾਰੇ ਹੀ ਦੇਖਣ ਆਏ ਆ ਇਹਨੂੰ ਦੇਖਣਾ ਹੀ ਆ ਤਮਾਸ਼ਾ ਕਰਨਾ ਨਹੀਂ ਹੈ ਜਿੱਦਣ ਕਰਨਾ ਛੱਡਤਾ ਜਿਹੜਾ ਪਾਪਪਨ ਮੰਨਦਾ ਤਮਾਸ਼ਾ ਕਰਦਾ ਜਿਹੜਾ ਉਹਦੇ ਹੁਕਮ ਚੱਲਦਾ ਉਹ ਤਮਾਸ਼ਾ ਦੇਖਦਾ ਜਿਹੜਾ ਆਪਣੇ ਪਾਣੀ ਚੱਲਦਾ ਉਹ ਤਮਾਸ਼ਾ ਕਰਦਾ ਜਿਹੜਾ ਗੁਰ ਕੇ ਚੱਲਦਾ ਉਹ ਤਮਾਸ਼ਾ ਕਰਦਾ ਨਹੀਂ ਫਿਰ ਦੇਖਦਾ ਹਾਂਜੀ देखे बूजे सब कुछ जाना है अंदर बाहर रव रहेया देखे बूझे सब कुछ जाना परमेश्वर देख रहा भी है बुझदा समझदा भी है सब कुछ अंदर और बाहर तमाशे दे अंदर भी है तमाशे तो अलग भी है हुक्म करके तमाशे दे अंदर है फागम करके तमाशे ते है अंदर बाहर रव रहे करके तमाशे तो बाहर है हुक्म करके ओदी इच्छा है ਜੋ ਤਮਾਸ਼ਾ ਹੋਈ ਤਮਾਸ਼ਾ ਹੋ ਰਿਹਾ ਆਪ ਫੇਰ ਵੀ ਤਮਾਸ਼ੇ ਤੋਂ ਬਾਹਰ ਹੈ ਉਹਦਾ ਪਾਣਾ ਹੀ ਤਮਾਸ਼ਾ ਹੈ ਉਹ ਆਪ ਤਮਾਸ਼ਾ ਨਹੀਂ ਹੈ ਉਹਦਾ ਪਾਣਾ ਤਮਾਸ਼ਾ ਹੈ ਨਹੀਂ ਠੀਕ ਹੈ ਜੀ ਇਹ ਬੜੀ ਇੰਪੋਰਟੈਂਟ ਲਾਈਨ ਹੈ ਕਿਉਂਕਿ ਜਿਹੜੇ ਕ੍ਰਿਸਚੀਅਨ ਲੋਕ ਹੈ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਹੁਕਮ ਔਰ ਹਾਕਮ 'ਚ ਕੀ ਫਰਕ ਹੈ ਉਹਨਾਂ ਨੂੰ ਸਮਝ ਨਹੀਂ ਆਉਂਦਾ ਉਹ ਜਿਹਨਾਂ ਨਾਲ ਮੇਰੀ ਗੱਲਬਾਤ ਹੁੰਦੀ ਹੈ ਕਹਿੰਦੇ ਸਾਨੂੰ ਆਹ ਨਹੀਂ ਸਮਝ ਆਉਂਦਾ ਪੁੱਛਣ ਵਾਲੀ ਗੱਲ ਔਖੀ ਹੈ ਉਹ ਆਜੂਗੀ ਸਮਝ ਉਹਨਾਂ ਦੇ ਉਹ ਆਦਮੀ ਠੀਕ ਨੇ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰਦੇ ਨੇ ਸਾਨੂੰ ਸਮਝ ਨਹੀਂ ਆਉਂਦਾ ਹਾਂਜੀ ਜਿਹੜੇ ਕਹਿੰਦੇ ਨੇ ਅਸੀਂ ਸਮਝ ਲਈ ਨਹੀਂ ਇਹ ਹੈ ਨਹੀਂ ਠੀਕ ਹੈ ਐਡਾ ਵੱਡਾ ਗਿਆਨ ਸਾਨੂੰ ਬਖਸ਼ਿਆ ਪਰ ਅਸੀਂ ਨਾ ਸਮਝਿਆ ਨਾ ਗਾਹਾਂ ਸਮਝਾ ਸਕਨੇ ਆਡੀ ਪਰਬਲ ਮਾਇਆ ਮਾਇਆ ਬਹੁਤ ਸ਼ਕਤੀਸ਼ਾਲੀ ਹੈ ਮਾਇਆ ਦੇ ਢੇਰ ਲੱਗ ਜਾਂਦੇ ਨੇ ਰੇਰਾ ਦੇ ਵਿੱਚ ਉਹ ਢੇਰ ਲੱਗੇ ਰਹਾ ਰੋਕਦਾ ਉਹਨਾਂ ਦਾ ਜਿਹੜੇ ਰਾ ਨੂੰ ਤੋੜਦੇ ਨੇ ਉਹ ਪਾਸੇ ਮਾਇਆ ਦੇ ਢੇਰ ਵੀ ਲਗਦੇ ਨੇ ਮਾਇਆ ਰੋਕ ਦਦੀ ਆਡੀ ਮਾਇਆ ਕਹਿੰਦਾ ਕਬੀਰ ساری ਸ਼ਕਤੀ ਮਾਇਆ ਆਪਣੇ ਖਿਲਾਫ ਝੋਕ ਦਿੰਦੀ ਹੈ ਸ਼ਕਤੀ ਝੋਕਦੀ ਉਹਨੇ ਮਾਇਆ ਛੜ ਭਾਈ ਕਹਿੰਦਾ ਮਾਇਆ ਜਾ ਮਾਇਆ ਇਹ ਤਾਂ ਛੜਾ ਹੈ ਮਾਇਆ ਨਹੀਂ ਕਰੋੜਾਂ ਰੁਪਏ ਦੀ ਗੋਲਕਾ ਕਿਹਾ ਚੌਂਦ ਮਾਇਆ ਦਾ ਉਹਨਾਂ ਨੇ ਇਹ ਤੇ ਕੀ ਲਣ ਇਹ ਤਾਂ ਪਾਗਲਾਂ ਦਾ ਕੰਮ ਹੈ ਰਾਈਆਂ ਦਾ ਕੰਮ ਹੈ ਬੌਰੀਆਂ ਦਾ ਨਾਨਕ ਵਰਗਿਆਂ ਦਾ ਕਾਰੋਬਾਰ ਛੱਡ ਕੇ ਫੇਰੀ ਜਾਣਾ। ਇਹ ਤਾਂ ਅੱਪੀ ਅਗਲਾਣਿਆਂ ਦਾ ਹੈ। ਉਹਨਾਂ ਦਾ ਤਾਂ ਗੋਲਕਾ ਕੰਮ। ਗੋਲਕ ਤੇ ਕਦ ਗਿਆ ਦਾ ਉਹ ਕੰਮ ਪੈਸੇ ਕਿ ਮੈਂ ਇਕੱਠੇ ਨੇ। ਸਾਰੀ ਅਗਲ ਉੱਥੀ ਚੋਕੀ ਪਈ ਆ ਉਹਨਾਂ ਦੀ। ਇਹ ਤਾਂ ਪਾਗਲਾਂ ਦਾ ਕੰਮ ਜਿਨ੍ਹਾਂ ਨੇ ਸੰਸਾਰ ਤਿਆਗ ਦੇ ਲ। ਸੜਕਾਂ ਮੰਗੂ ਨੇ, ਸੇ ਮਾਰਗ ਦੀ, ਚਾਰ ਮਾਰਗ ਦੀ। ਹਾਂਜੀ। ਗੁਰੂ ਅਮਰਦਾਸ ਵੱਲੋਂ 10ਵੀਂ ਪੌੜੀ ਚ ਉਪਦੇਸ਼ ਹੈ ਜੀ ਪੱਪੇ ਅੱਖਰ ਤੋਂ। ਹੇ ਪੱਪੇ ਪਾਰ ਨਾ ਪਵਹੀਂ ਮੂੜੇ ਪਰ ਪੰਜ ਤੂੰ ਪਲਚ ਰਹਾ ਉਹ ਕਹਿੰਦੇ ਪੱਪੇ ਪਾਰ ਨਾ ਕੋਈ ਮੂੜੇ ਉਪੂਰ ਖੈ ਦਾ ਪਾਰ ਨਹੀਂ ਪਾਇਆ ਜਾਣਾ ਨਾਨਕ ਨੇ ਕਿਹਾ ਤੂੰ ਤਾਂ ਪਰਪੰਚ 'ਚ ਉੜ ਗਿਆ ਉਹ ਪਰਪੰਚ ਦਾ ਵੀ ਪਾਰ ਪੈਣਾ ਤੇਤੇ ਪਰਪੰਚ ਦਾ ਵੀ ਪਾਰ ਪੈਣਾ ਜੇ ਪਰਪੰਚ 'ਚ ਚਿਪੜ ਚੇਗਾ ਤਾਂ ਇਹਦਾ ਵੀ ਨਹੀਂ ਪਾਰ ਪੈਣਾ ਇਹਦੀ ਵੀ ਨਹੀਂ ਤੈਨੂੰ ਇਹ ਨੂੰ ਸਮਝਣ ਦੀ ਕੋਸ਼ਿਸ਼ ਨਾ ਕਰ ਪਰਪੰਚ ਨੂੰ ਤੇਰੇ ਨੀ ਸਮਝਣਾ। ਉਸ ਜਗ੍ਹਾ ਦੇ ਵਿੱਚ ਉੜ ਜਾਂਦਾ ਤੂੰ ਦੁਨੀਆਂ ਪਰਪੰਚ ਚੁਲਜੀ ਹੋਈ ਏ ਸਾਰੀ ਉਹ। ਇੱਥੇ ਗੁਰ ਜਾਂਦੀ ਹੈ। ਲੈ ਕੀ ਜਾਣਾ ਕੁਝ ਵੀ। ਹਾਂਜੀ। ਅੱਛਾ ਆਪ ਖਵਾਈਓਏ ਮੂੜੇ ਇਹ ਸਿਰ ਤੇਰੇ ਲੇਖ ਪਿਆ। ਸੱਚੇ ਆਪ ਖਵਾਈਓ ਮੂੜੇ ਉਹ ਲਾ ਸੱਚਾ ਤੇਰੇ ਅੰਦਰਲਾ ਉਹਨੇ ਵੀ ਤੇਰਾ ਛੜਦਾ ਖੜਾ ਉਹ ਕਹਿੰਦਾ ਇਹ ਨਹੀਂ ਮੰਨਦਾ ਇਹ ਪਰਪੰਚ ਜਿਆਦਾ ਚੱਲ ਇਹਨੂੰ ਪਰਪੰਚ ਦਾ ਹੀ ਸਵਾਦ ਲੈਣ ਦੋ ਨਹੀਂ ਮੰਨਦਾ ਇਹਨੇ ਮੰਨਣਾ ਵੀ ਹੈ ਨਹੀਂ ਇਹਨੂੰ ਦੇਖ ਲੈਣ ਦੋ ਉਹਨੇ ਵੀ ਖਵਾਤਾ ਤੈਨੂੰ ਊੜੇ ਇਹ ਸਿਰ ਤੇਰਾ ਲੇਖ ਪਿਆ ਬਸ ਇਹਨੂੰ ਲੇਖ ਹੈ ਤੇਰੇ ਸਿਰ ਦੇ ਉੱਤੇ ਇਹ ਲੇਖ ਦਿਮਾਗ 'ਚ ਹੈ ਲੇਖ ਪਰ ਸ਼ੈਤਾਨ ਦਾ ਚਰਖਾ ਘੇੜ-ਘੇੜ ਕੇ ਲੇਖ ਲਿਖ ਲਿਆ ਨਾ ਦਿਮਾਗ ਚ ਤਾਂ ਹਿਰਦੇ ਵਾਲਾ ਲੈ ਦਿਮਾਗ ਵਾਲਾ ਲੈ ਲਿਆ ਜੋ ਲਿਖ ਕੇ ਲਿਆ ਸੀ ਆਪ ਲੈ ਆਪ ਜੋ ਸੋਚਿਆ ਉਹ ਤੇਰੇ ਦਿਮਾਗ ਚ ਆ ਜੋ ਲਿਖ ਕੇ ਲਿਆ ਸੀ ਉਹ ਅੰਤਰਾਤਮਾ ਦੀ ਆਵਾਜ਼ ਠੀਕ ਹੈ ਜੀ ਬਾਪਨ ਅਖਰੀ ਮਹਲਾ ਦਾ ਉਪਦੇਸ਼ ਫੌੜੀ ਨੰਬਰ 73 ਵਿੱਚ ਉਪਦੇਸ਼ ਹੈ ਜੀ ਪਪਾ ਪਰਮਤ ਪਾਰ ਨਾ ਪਾਇਆ ਪਤਿਤ ਪਾਵਨ ਅਗੰਮ ਹਰ ਰਾਇਆ ਪਪਾ ਪਰਮਿਤੇ ਪਾਰ ਨੂੰ ਪਾਇਆ ਉਹ ਪਰਮਿਤੀ ਹੈ ਪਰਪਕਾਰ ਹੈ ਆਪਣੀ ਨਹੀਂ ਮਰਜ਼ੀ ਹੈ ਦੀ ਮਰਜ਼ੀ ਹੈ ਪਰਮੇਸ਼ਰ ਦੀ ਮਰਜ਼ੀ ਚੱਲਣਾ ਪਰਮੇਸ਼ਰ ਦੀ ਮਰਜ਼ੀ ਦਾ ਪਾਰ ਨਹੀਂ ਪਾਉਣਾ ਪਾਣੀ ਕਰਨਾ ਪਾਣੀ ਦਾ ਪਾਰ ਨਹੀਂ ਪਾਉਣਾ ਆਪਾਂ ਦੇ ਵਕੀਲ ਲੈਣਾ ਸਾਰਾ ਪਾਣਾ ਹੀ ਆ ਜੋ ਦਿਖ ਰਿਹਾ ਇਹ 12 ਪਾਉਂਡ ਦੀ ਲੋੜ ਲਈ ਹੋਜੀ ਆ ਪਤਿਤ ਪਾਵਨ ਅਗੰਮ ਹਰ ਰਾਯਾ ਅਗੰਮ ਹਰ ਰਾਯਾ ਜਿਹੜਾ ਹੈਗਾ ਉਹ ਪਤਿਤ ਪਾਵਨ ਆਪਾ ਨੂੰ ਪਾਵਨ ਕਰ ਦੂਗਾ ਆਪਾ ਪਤਾਂ ਨੇ ਕਾਬਲ ਹੋਣਾ ਨਾ ਕਿ ਉਹਦਾ ਪਾਰ ਪਾਉਣਾ ਹੋਰ ਕੀ ਕੀ ਕਰ ਸਕਦਾ ਹੁਕਮ ਆਪਾਂ ਨੇ ਕੀ ਲੈਣਾ ਕਿੰਨਾ ਕੁਸ਼ ਕੀਤਾ ਹੋਇਆ ਹੁਕਮ ਦਾ ਆਪਾਂ ਨੇ ਕੀ ਲੈਣਾ ਕਿੰਨੇ ਪਲੈਨਟ ਬਣਾਏ ਹੋਣੇ ਆਪਾਂ ਨੇ ਕੀ ਲੈਣਾ ਕਿਤੇ ਕਿਤੇ ਕੀ ਕੀ ਆਪਾਂ ਨੇ ਕੀ ਲੈਣਾ ਆਪਾਂ ਨੇ ਪੱਤਾਂ ਨੂੰ ਪਾਵਨ ਕਰਨ ਦਾ ਆਪਾਂ ਨੇ ਆਪਣੇ ਮਤਲਬ ਦੀ ਗੱਲ ਲੈ ਤੇ ਕਿ ਆਪਾਂ ਪੱਤਾਂ ਹੁਕਮ ਵੀ ਚੱਲਾਂਗੇ ਪਾਵਰ ਹੋ ਜਾਂਦੇ ਬਸ ਇੰਨਾ ਹੀ ਸਾਡਾ ਮਤਲਬ ਬਾਕੀ ਕੋਈ ਮਤਲਬ ਨਹੀਂ ਬਾਕੀ ਉਹਦੀਆਂ ਸ਼ਕਤੀਆਂ ਨੇ ਆਪਰ ਨੂੰ ਦੀਆਂ ਸ਼ਕਤੀਆਂ ਬਿਆਸਰ ਆਹ ਨੇ ਆਪਰ ਵਧੀਆ ਸ਼ਕਤੀਆਂ ਤੇ ਕੀ ਲੈਣਾ ਹੋਜੀ ਹੋਤ ਪਨੀਰ ਕੋਟ ਅਪਰਾਧੂ ਅੰਮ੍ਰਿਤ ਨਾਮ ਜਪੈ ਮੇਰੇ ਸਾਧੂ ਜੇ ਸਾਧੂ ਆ ਨਾਮ ਕਿਵੜਾ ਵਰਤ ਨਾਮ ਜਪ ਲਈਏ ਉਹਦਾ ਗਿਆਨ ਸਮਝ ਲਈਏ ਗੁਰਬਾਣੀ ਦਾ ਜਿਹੜਾ ਦੱਸਿਆ ਕਰੋੜਾਂ ਅਪਰਾਧ ਕੀਤੇ ਹੋਏ ਜਿਹੜੇ ਨੇ ਉਹ ਬਿਟ ਜਾਂਦੇ ਉਹਨਾਂ ਤੋਂ ਮੁਕਤੀ ਮਿਲ ਜਾਂਦੀ ਮਾਫੀ ਮਿਲ ਜਾਂਦੀ ਹੈ ਉਹਨਾਂ ਤੋਂ ਉਹਨਾਂ ਤੋਂ ਮਾਫੀ ਮਿਲ ਸਕਦੀ ਹੈ ਆ ਗੁਰਬਾਣੀ ਨੂੰ जप ਲਈਏ ਉਹਦਾ ਪ੍ਰਾਇਸ਼ਿਤ ਕਰ ਲਈਏ ਗਾਹ ਨੂੰ ਆਕਾਸ਼ ਨਾ ਕਰੀਏ ਪਿਛਲੇ ਔਗਣ ਬਖੀਰਦਾ ਅੱਗੇ ਰਸਤੇ ਪਾ ਦਿੰਦਾ ਪਰ ਅੱਗੇ ਰਸਤੇ ਪਿਆ ਰਹੇ ਤਾਣੇ ਫੇਰ ਕਿਤੇ ਬੇਬਖੋ ਜਾ ਫਿਰ ਕੁਝ ਵੀ ਬਣਦਾ कुछ ਦੋਦਾ ਕੁਝ ਨਹੀਂ ਬਣਦਾ ਪਰ ਪੰਚ ਤ੍ਰੋ মোহ ਮਿਟਨਾਈ ਚਾ ਕੋ ਰਾਖੋ ਆਪ ਗੁਸਾਈ ਪਰ ਪੰਚ ਤ੍ਰੋ মোহ ਇਹ thro ਉਹ ਪਰਪੰਚ ਚੰਗੀ ਚੀਜ਼ਾਂ ਨੇ ਪਰਪੰਚ ਤਾਂ ਐ ਕਰਦੇ ਨੇ ਜਿਹੜੇ ਸੰਤ ਪੈਦਾ ਹੋ ਜਾਂਦੇ ਨੇ ਪਰਪੰਚ ਕਰਦੇ ਨੇ ਜਿਹੜੇ ਢੇਰਾ ਬਣਾ ਲਿਆ ਦੀ ਉਹ ਕਰਦੇ ਨੇ ਜੀ ਉਹ ਕਰਦੇ ਮਾਇਆ ਕੱਢੀ ਕਰ ਉਹ ਪਰਪੰਚ ਦਿਮਾਗ ਪਰਪੰਚ ਖੜਾ ਕਰ ਦਿੰਦੇ ਸਿਰ ਉਹ ਕਰਦੇ ਨੇ ਗੋਲਕ ਲੈ ਲਈ ਗੁਰੂ ਤੋਂ ਰਾਜ ਲੈ ਲਿਆ ਗੁਰੂ ਤੋਂ ਜਿਹੜੀ ਗੁਰਮਤਿ ਉਹਦਾ ਬਾਤ ਦਾ ਭੋਗ ਗੁਰਦੁਆਰੇ ਦੀ ਗੁਰੂ ਦੀ ਗੱਲ ਨਹੀਂ ਕਰਨ ਦੇਣੀ ਗੁਰਦੁਆਰਿਆਂ 'ਚ ਗੁਰਮਤਿ ਦੇ ਖਿਲਾਫ ਸਭ ਕਰਦੇ ਨੇ ਖਲਾ ਪ੍ਰਚਾਰ ਕਰਨਾ ਧਰੋ ਆ ਇਹ ਵੋ ਆਈਆ ਜਿਹੜਾ ਕੱਟ ਕੀਤਾ ਵੋ ਇਹ ਹੈ ਸਰੀਰ ਦਾ ਵੋ ਕਰਦਿਆਂ ਦਾ ਵੋ ਉਹਦੇ ਖਾਤਰ ਗੋਲ ਕਰਨੇ ਡੱਕ ਵਰਤ ਦਾ ਪ੍ਰਚਾਰ ਦੀ ਕਰਨਾ ਆਪਣਾ ਘਰ ਪਰਦੇ ਗੋਲ ਕਰਨ ਆਪਣੇ ਰਿਸ਼ਤੇਦਾਰਾਂ ਨੂੰ ਕੁਝ ਕਰਨਾ ਆਪਣੇ ਨਾਲ ਦੇ ਪਾਰਟੀ ਵਾਲਿਆਂ ਨੂੰ ਕੁਝ ਕਰਨਾ ਗੋਲ ਕਰਨੂ ਕਿਵੇਂ ਸਾਡੀ ਕੁਰਸੀ ਬਣੀ ਰਹੇ ਗੋਲ ਕਰਨ ਉਸ ਤਰੀਕੇ ਨਾਲ ਇਸਤੇਮਾਲ ਕਿਵੇਂ ਅਸੀਂ ਵੋਟਾਂ ਲੈਡੀਆਂ ਨੇ ਗਾਂ ਨੂੰ ਗੋਲ ਕਰਨ ਉਸ ਤਰੀਕੇ ਨਾਲ ਇਸਤੇਮਾਲ ਕਰਦੇ ਇਹ ਧਰੋ ਆ ਗੁਰੂ ਨਾਲ ਇਹ ਬੜਾ ਭਾਰੀ ਤ੍ਰੋ ਹੈ ਗੁਰੂ ਰਾਮ ਤ੍ਰੋ ਦੀ ਸਗਾ ਬੜੀ ਵੜੀ ਅੰਦਰ ਸਾਰਿਆਂ ਦੇ ਕੱਬੇ ਹੋਏ ਨੇ ਅੰਦਰੋਂ ਸਿੱਧੀ ਦਾ ਪਤਾ ਹੈ ਨਹੀਂ ਕੀ ਬਿੜੂਗਾ ਫਿਰ ਪਤਾ ਲੱਗੂ ਸਾਰਿਆਂ ਨੂੰ ਪਰ ਪੰਜ ਮੋਹ ਮਿਟਨਾਈ ਬਿੜ ਜਾਂਦੇ ਨੇ ਅੰਦਰੋਂ ਗੁਰਬਾਣੀ ਬੋਲਦੀ ਹੈ ਨਹੀਂ ਉਹ ਨਾ ਸਰ ਨੂੰ ਜੀ ਕਰਦਾ ਐ ਨਾ thro ਕਰੂ ਜੀ ਕਰਦਾ ਨਾ ਮੋਹ ਨੂੰ ਜੀ ਕਰਦਾ ਐ ਐਡੀ ਸ਼ਕਤੀ ਰੱਖਦੀ ਐ ਗੁਰਮਤ ਕੋਈ ਸ਼ਕਤੀ ਵੀ ਦੁਨੀਆ ਦੀ ਮਿਟਾ ਸਕਦੀ ਐ ਇਹਨੂੰ ਗੁਰੂ ਦਾ ਗਿਆਨ ਮਿਟਾ ਸਕਦਾ ਸਮਰੱਥਾ ਹੋ ਇਹ ਗਿਆਨ ਸਮਰੱਥਾ ਐ ਸਮਰੱਥਾ ਮਿਟਾ ਦਿੰਦਾ ਪਰ ਜੇ ਕੋਈ ਮਿਟਾਉਣਾ ਚਾਹੁੰਦਾ ਹੋਵੇ ਉਹਦਾ ਮਿਟਾਉਂਦਾ ਜਿਹੜਾ ਚਾਹੁੰਦਾ ਹੀ ਉਹਦਾ ਕੋਈ ਮਿਟਾ ਨਹੀਂ ਜੇ ਮਤਲਬ ਕੋਈ ਚਾਹੁੰਦਾ ਗੁਰੂ ਦਾ ਗਿਆਨ ਮਿਟਾ ਸਕਦਾ ਸਮਰੱਥਾ ਹੈ ਔਰ ਗੁਰਜੀ ਜੀ ਦੇ ਗਿਆਨ ਦੀ ਇਹ ਸਭ ਦਾ ਗਿਆਨ ਦੀ ਹੋਣੀ ਹੈ ਨਾ ਗਿਆਨ ਦੀ ਉਪਦੇਸ਼ ਦੀ ਗਿਆਨ ਦੀ ਹਾਂਜੀ ਜਾਕੋ ਰੱਖੋ ਆਪ ਗੁਸਾਈਂ ਹਾਂਜੀ ਨੂੰ ਗੁਸਾਈਂ ਰੱਖਿਆ ਕਰੂਗਾ ਸਬੰਧ ਗੁਰੂ ਹੱਥ ਤਰੂਗਾ ਸਰਤੇ ਜਿਹੜਾ ਉਹਦੀ ਛੜਨ ਉਹ ਬਹੁਗਾ ਲੋਹਾ ਰਾਬੀ ਗੁਨਾਗਾਰ ਬੇਗਾਨਾ ਅਲਪ ਮਤ ਜੇ ਗੱਲ ਬੰਨੂਗਾ ਅੰਦਰੋਂ ਫਿਰ ਆਤਰੂ ਹੋਏਗਾ ਹਾਂਜੀ ਬਾਤਸ਼ਾ 76 ਸਿਰਸੂ ਨਾਨਕ ਦੂਸਰ ਅਵਰ ਨਕੋਉ ਹੋਈ ਬਾਤ ਜਾਏ ਜਿਹੜਾ ਤਰੋ ਨਹੀਂ ਤੋਂ ਬਚ ਗਿਆ ਜਿਹੜਾ ਮੋਹ ਤੋਂ ਬਚ ਗਿਆ ਜਿਹੜਾ ਪ੍ਰਪੰਚ ਤੋਂ ਬਚ ਗਿਆ ਪ੍ਰਪੰਚ ਤੋਂ ਕੋ ਬਿਰਲਾ ਬਚਦਾ ਪਰਪੰਚ ਫਾਇਜਾਂਦ ਨੇ ਪਰਪੰਚ ਨਹੀਂ ਕਿਸੇ ਨੂੰ ਜਾਣ ਦਿੰਦਾ ਮਾਇਆ ਮਾਇਆ ਕਰਕੇ ਪਰਪੰਚ ਰਾਜਦਾ ਠੀਕ ਹੈ ਜੀ ਬੰਦੇ ਕਈ ਇਮਾਨ ਕਾ ਜੋਨ ਰੱਖੇ ਪਰਪੰਚ ਨਾਨਕਾ ਨੂੰ ਘਰ ਲਈ ਨੇ ਰਾਜਾਂਦੇ ਜਿਹੜੇ ਪਰਪੰਚ ਨਹੀਂ ਰੱਖਦੇ ਨਹੀਂ ਤਾਂ ਚੜਾਪੜ ਜਿਹਦੇ ਕੋਈ ਸੋਸਾਇਟੀ ਬਣਾਈ ਹੋਈ ਜਿਸ ਸੜਕਾਤੀ ਅਖਬਾਰਾਂ ਨੇਤਾ ਸੰਸਥਾ ਬਣਾ ਲਈ ਆ ਸੰਸਥਾ ਬਣਾਈ ਫਿਰਦੇ ਨੇ ਪਰਪੰਚ ਨੇ ਸਭ ਦੇ ਆਖਰੀ ਪਤਾ ਗੁਰਬਾਣੀ ਬਾਰੇ ਹਾਂਜੀ ਪਾਸ਼ਾ 76 ਸਿਰ ਸੋ ਨਾਨਕ ਦੂਸਰ ਅਵਰਨ ਕੋ ਜਿਹੜਾ ਪਰਪੰਚ ਦੀ ਰਾਜ ਹੈ ਉਹ ਹੀ ਪਾਸ਼ਾ ਹੈ ਉਹਦੇ ਸਿਰ 70 ਹੈ ਛਤਰ ਕੀ ਹੈ ਸਿਰ ਤੇ ਸਿਰ ਤੇ ਹੱਥ ਹੈ ਉਹਦੇ ਹੁਕਮ ਦਾ ਹੱਥ ਗੁਰੂ ਗੁਰਬਾਣੀ ਦੀ ਸੋਚ ਆ ਜਾਂਦੀ ਹੈ ਜਿਸ ਬਖਸ਼ੇ ਸਿਰ ਤੇ ਸਲਾ ਨਾਂਨ ਪਾ ਚਾਈ ਪਾ ਦਾ ਛਤਰ ਉਹਦੇ ਤੇ ਜਿਨ੍ਹਾਂ ਨੇ ਗੁਰਬਾਣੀ ਰਚੀ ਹੈ ਆ ਜਾਇਦੇ ਛਤਰੋਹ ਦੇ ਤੇ ਜਿਨ੍ਹਾਂ ਨੇ ਗੁਰਬਾਣੀ ਦੱਸੀ ਹੈ ਵਿਆਖਿਆ ਕੀਤੀ ਹੈ ਜੇਨ ਪਾਸ਼ਾ ਨੇ ਵਿਆਖਿਆ ਕੀਤੀ ਹੈ 5ਵੇਂ 8ਵੇਂ ਨੇ ਵਿਆਖਿਆ ਕੀਤੀ ਹੈ 10ਵੇਂ ਨੇ ਵੀ ਵਿਆਖਿਆ ਕੀਤੀ ਹੈ ਗੁਰਬਾਣੀ ਦੀ ਐਸੇ ਬਾਣੀ ਗੁਰਬਾਣੀ ਦੀ ਵਿਆਖਿਆ ਕੀਤੀ ਹੈ ਆਪਣੀ ਦੂਜੀ ਭਾਸ਼ਾ ਜੀਤੀ ਹੈ ਨਾਨਕ ਦੂਸਰ ਅਵਰਨਾ ਕੋ ਦੂਸਰ ਉਹਦੇ ਬਰਾਬਰ ਹੋਰ ਕੁਝ ਨਹੀਂ ਹੈ ਉਹ ਉਹਦੇ ਵਰਗਾ ਉਹੀ ਹੋ ਸਕਦਾ ਇਆ ਦੂਜਾ ਵੀ ਉਹਦੇ ਨਾਲ ਲੋਹੇ ਜਾਈ ਹੁੰਦਾ ਦੂਸਰ ਨਹੀਂ ਦੂਜੀ ਵੈਰਾਈਟੀ ਕੋਈ ਨੀ ਹੈ ਉਸ ਬਾਦਸ਼ਾਹ ਦੀ ਐ ਦੂਜੇ ਜਿਹੜੇ ਸੰਸਾਰੀ ਬਾਦਸ਼ਾਹ ਨੇ ਉਹਦੀਆਂ ਵੈਰਾਈਟੀਆਂ ਮਸੇੜੀਆਂ ਠੀਕ ਹੈ ਜੀ ਤਾਂ ਪਪੇ ਤੋਂ ਜਿਹੜਾ ਉਪਦੇਸ਼ ਹੈ ਉਹ ਇਹੀ ਸਮਝਾਉਂਦੀ ਹੈ ਕਿ ਅਸੀਂ ਪਰਪੰਚ ਤੋਂ ਬਚਣਾ ਪਰਮ ਜੋਤ ਦੇ ਨਾਲ ਪਰਚਾ ਲਾਉਣਾ ਵੱਡੀ ਗੱਲ ਪਰਪੰਚ ਹੈ ਸਭ ਤੋਂ ਵੱਡਾ ਖਤਰਾ ਪਰਪੰਚ ਦਾ ਪਰਪੰਚ ਖਾਤਰ ਝੂਠ ਬੋਲੇ ਜਾਂਦੇ ਨੇ ਪਰ ਪੰਚ ਵਾਸਤੇ 베ਰੀ ਬਣਾਈ ਆ ਦੁਖ ਭਜੜੀ ਲੋਕ ਤਾਂ ਆਉਂਦੇ ਨੇ ਬਾਣੀ ਸੁਣਨੀ ਉੱਥੇ ਕਹਿੰਦਾ ਗੁਰਬਾਣੀ ਸਮਝਣ ਕੋਈ ਨਹੀਂ ਹੁੰਦਾ ਜਾਂਦਾ ਸਰੋਵਰ ਦੇ ਸ਼ਾਨ ਲੋਕ ਕਰਨ ਜਾਂਦੇ ਤੇ ਬੰਗਲੇ ਕਾਲੇ ਹੋ ਕੇ ਚਿੱਟੇ ਕੋੜੇ ਕੋੜ ਦੂਰ ਹੋ ਗਿਆ ਤਾਂ ਤਾਂ ਲੋਕ ਅਜੀ ਭੀੜ ਲੱਗੀ ਸੀ ਕਰਕੇ ਲੱਗੀ ਸੀ ਗੁਰਬਾਣੀ ਕਰਕੇ ਕੋਈ ਨਹੀਂ ਲੱਗੀ ਸਭ ਝੂਠ ਹੈ ਗੁਰਬਾਣੀ ਤੋਂ ਨਹੀਂ ਸੁਣਦਾ ਜਿਹੜੇ ਉੱਥੇ ਰਹਿੰਦੇ ਨੇ ਉਹ ਨਹੀਂ ਸਮਝਦੇ ਉਹਦੀ ਵਿਚਾਰ ਕਰਦੇ ਸਭ ਪਰਪੰਚ ਹੈ ਪਰਪੰਚ ਹੀ ਹੈ ਜਿੱਤੇ ਗੁਰੂ ਬੈਠੇ ਨੇ ਉਹਨਾਂ ਨੇ ਪਰਪੰਚ ਦੀ ਕੀਤੀ ਨੋਟ ਕਰਵਾਇਆ ਜਾਂ ਕੋਈ ਪਰਪੰਚ ਨਹੀਂ ਕੀਤਾ ਠੀਕ ਹੈ ਜੀ ਸੋ ਆ ਪਰਪੰਚ ਤੋਂ ਆਪਾਂ ਸਭ ਨੇ ਬਚਣਾ ਇਹੀ ਮੂਲ ਉਪਦੇਸ਼ ਹੈ ਪੱਪੇ ਅਖਰ ਤੋਂ ਇੱਥੇ ਪੱਪੇ ਅਖਰ ਦੇ ਉਪਦੇਸ਼ ਦੀ ਸਮਾਪਤੀ ਹੈ ਜੀ ਹਾਂ